ਸੁੱਤੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ ਸੱਖ ਸੁੱਤੇ ਪਏ ਨੇ ਅਣਜਾਣ ਆਦਮੀ ਮਾਇਆ ਦੇ ਝੂਠੀ ਦੇ ਅਸੰਖ ਮਾਇਆ ਝੂਠੀ ਕਾਰਣੇ ਨਹੀਂ ਜਣਾ ਜਾ ਸਕਦਾ ਕਿੰਨੇ ਸੁੱਤੇ ਪਏ ਨੇ ਆਪਣੇ ਨਾਮ ਕੰਨਿਓ ਆਪਣੇ ਧਨੀ ਕੰਨਿਓ ਆਪਣੇ ਹੋਰ ਕੰਨਿਓ ਸੁੱਤੇ ਪਏ ਨੇ ਆਇਆਂ ਨਾਲ ਜੁੜੇ ਹੋਏ ਨੇ ਆਇਆ ਝੂਠੀ ਕਾਰਣੇ ਤੂੰ ਡਿਵਾਈਰ ਦੇ ਕਾਰਨ ਸੱਚ ਤੇ ਆਇਆ ਹੋਇਆ ਆ। ਨਾਰਕ ਤੇ ਜਾਗਨ ਤੇ ਰਸਨਾ ਨਾਮ ਉਚਾਰਨਾ। ਜਿਹੜੇ ਨਾਮ ਦਾ ਉਚਾਰਨ ਕਰਦੇ ਨੇ। ਜਿਹੜੇ ਜੀਵ ਨਾਲ ਉਚਾਰਨ ਕਰਦੇ ਨੇ। ਜੀਵ ਨਾਲ ਉਚਾਰਨ ਕਰਦੇ ਨੇ ਕਰਨ ਵਾਲੀ ਚੇਤਨਾ ਰਸਨਾ ਚੇਤਨਾ। ਉਚਾਰਨ ਕਰਦੀ ਹੈ ਜੀਵ। ਜਿਹੜੇ ਬੋਲ ਦੁਆਰਾ ਉਚਾਰਨ ਕਰਦੇ ਨੇ। ਬੋਲ ਦਾ ਕੋਣ ਹੈ? ਬੋਲ ਦਾ ਸਤਿ ਸਰੂਪ। ਬੋਲ ਦਾ ਪਰਮ ਤਾਤ ਹੈ, ਪਰਮ ਤਾਤਮੈ ਰਹਿਣ ਦਾ ਰੂਪ। ਇਸ ਕਰਕੇ ਰਸਨਾ ਜਿਹੜੀ ਹੈ ਆਪ ਉਹ ਜਾਣ ਕਰਦੀ ਹੈ ਸ਼ਰੀਰ ਵਿੱਚ ਰਹਿ ਕੇ ਉਹ ਜਿਹੜੇ ਹੈ ਉਹ ਜਾਗਦੇ ਨੇ ਜਿਹੜੀ ਆਤਮਾ ਉਹ ਕਰਦੀ ਹੈ ਵਿਆਖਿਆ ਕਰਦੀ ਹੈ ਨਾਮ ਦਾ ਉਪਦੇਸ਼ ਕਰਦੀ ਹੈ ਗੁਰਬਾਣੀ ਜਿਹਨਾਂ ਨੇ ਲਿਖੀ ਹੈ ਦੱਸੀ ਹੈ ਉਪਦੇਸ਼ ਤੇ ਉਹ ਜਾਗਦੇ ਸੀ ਪਰ ਉਹ ਜਾਗਦੇ ਹਨ ਤੇ ਰਸਨਾ ਦਾ ਭਾਵ ਚੇਤਨ ਹੈ ਜੀ ਆ ਜਿਹੜਾ ਠੀਕ ਹੈ ਜੀ ਆਪਾਂ ਇਹਨੂੰ ਬਾਹਰਲੀ ਜੀਬ ਨੂੰ ਰਸਨਾ ਨਹੀਂ ਕਹਿ ਸਕਦੇ ਬੁੱਧੀ ਨੂੰ ਰਸਨਾ ਕਹਾਂਗੇ ਹਾਂਜੀ ਠੀਕ ਹੈ ਨਾਮ ਉਚਾਰਨੇ ਦਾ ਭਾਵ ਕੀ ਹੈ ਵੀ ਨਾਮ ਦਾ ਵਖਿਆਨ ਕਰ ਰਹੀ ਹੈ ਨਾਮ ਕੌਣ ਹੈ ਸਵਾਲ ਤਾਂ ਹੈ ਲਿਖਿਆ ਨਾ ਬੋਲਣ ਵਾਲਾ ਸਤ ਸਰੂਪ ਹੈ ਠੀਕ ਹੈ ਜੀ ਠੀਕ ਹੈ ਜੀ ਇੱਥੇ 13 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ